आप जपाय जपे सनो आप जपाय जपे सनो नाम जपे, जप जपे सोनो। ना जब सोए उन्होंने के आखरी आप जो जपन बजी जब सारे बज गए गੁਰبانی दूना तो पढ़ी आप जपाय जपे सनो कहंदे नाम है ना नाम जपे जपे सोए जेड़ा है ਜਿੱਤੇ ਸਭ ਕੀ ਯਾਦ ਹੁੰਦੀ ਐ ਉਹ ਜੇ ਆਪ ਚ ਪਾਉਂਦਾ ਨਾ ਆਪਣਾ ਮੂਲ ਪ੍ਰਭ ਤਾਂ ਜਪਿਆ ਜਾਂਦਾ ਐ ਭੱਲਾ ਵੀ ਜਪ ਸਕਦਾ ਜੋ ਨਹੀਂ ਬਾਣੀ ਸਮਝ ਆਈ ਮਨੁਬਤੀ ਦੇ ਲੈਵਲ ਤੇ ਸਮਝਣ ਲੱਗੇ ਫਿਰ ਮੈਂ ਆ ਜਾਂਦੀ ਇਹਦੇ ਖਾਤਰ ਸਰਤਾ ਆਪ ਚ ਪਾਏ ਉਹ ਸੁਣੋਂ ਜਪੂਗਾ ਜਿਹਨੂੰ ਤੂੰ ਆਪ ਜਪਾਉਗਾ ਉਹ ਇਹਦਾ ਮੂਲ ਬੇਰੀ ਬੇਹੰਦਾ ਹਰਮਤੀ ਦੀ ਲੇਵੰਦੀ ਗੱਲ ਨਹੀਂ ਹੈ ਹੋਚ ਰਹਾ ਹੈ ਅਗਮਾ ਕੋਚਰ ਪਰਮਥ ਹੋਏ ਜੋ ਜੋ ਕਹੇ ਸੋ ਮੁਤਾ ਹੋਏ ਅਗਮ ਆਗਾਦ ਪਰਮਥ ਹੋਏ ਇਹ ਭੁਤੀ ਤੋਂ ਪਰੇ ਆਗਾਦ ਹੋ ਗਏ ਜੋਤੀ ਭੁਤੀ ਤੋਂ ਪਰੇ ਹੈ ਕਿਵੇਂ ਪਕੜਦਾ ਜੀ ਭੁਤੀ ਦੇ ਰੇਣ ਤੋਂ ਪਰੇ ਪ੍ਰਚਮੇ ਆਉਂ ਜਿੱਤੀ ਕੋ ਜਿਆਦਾ ਹੋ ਲਾਈਟ ਦੁੱਧਣਾ ਫਲਤੂ ਪੌਂਦੀ ਕੇ ਫਲਤੂ ਬਾਂਦੀਦਾ ਇੱਕ ਇਸਤਾਨ ਨਾਲੇ ਰੀਦਾ ਹੁੰਦਾ ਕੋਈ ਤੋ ਕੋਈ ਤਬਰਦ ਪਿਆ ਆਪ ਕੋ ਦੇਖ ਰਹੇ ਜਿੰਨਾ ਤਰੋਂ ਕੇ ਉਹਨਾ ਕੇ ਘਾੜਾ ਜਿਹੜਾ ਖੜ ਗਿਆ ਉਹਨੂੰ ਬਾਂਦੀਦਾ ਜੀ ਬਹੁਤ ਦੇਰ ਹੋ ਗਈ ਜਦਿਓ ਦਸੀ ਹੋਈ ਗੱਲ ਆ jitna gahan toro we utna hi gahan ho dasta je apni so gaye takne ga jandi hai je 10 gawe gahan chal gaye sadhe ho dase gaye ਇਹ ਜੇ ਸ਼ਕਤੀਵਤੀ ਹੈ ਤੇ ਕਦ ਸ਼ਕਤੀਵਤੀ ਪਿੰਡਾਂ ਵੀ ਹੈ ਜਬੇ ਉਹ ਫਿਰ 200 ਦੀ بجائے 100 ਦੀ بجائے 200 ਵਜੇ ਤੱਕ ਵੀ ਆਉਣੇ ਹੋਣੇ ਦੇਖਣ ਲੱਗ ਜਾਂਦਾ ਇਹ ਹੋ ਰੋਗੇ ਨਾ ਪਿੰਡਾਂ ਵੀ ਜ਼ਿਆਦਾ ਘਬਰ ਹੋ ਗਿਆ ਨਾ ਫਿਰ ਹਾਂ ਤਾਂ ਹੋ ਗਿਆ ਫਿਰ ਇਦਾਂ ਹੋ ਜਾਂਦਾ ਆਪ ਵੀ ਗਵਾਏ ਸੋ ਹਰ आप गवाए का हर गुण गाओ जे आप गवावे ताहे हर गुण गाए जा सकदे ने तो हर गुण गाओ प्रभु कृपा ते होए प्रगास परम दया ते कमल बिगास प्रभु कृपा ते होए प्रगास ओदी कृपा नाले अंदर चालन प्रगास अंदरला चलना बांद ला दी ए अंदरले चालन दे सते ही एदे हो रहे ਅੰਤਰੇ ਚਾਨੂੰ ਬਦਰਿਆ ਜਿਉਂ-ਜਿਉਂ ਬਦਰਿਆ ਅੰਦਰ ਚਾਨੂੰ ਕਿਉਂ ਤੇ ਉਹ ਜਿਹੜਾ ਘਾਹ ਦਾ ਔਖਾ ਉਹ ਫਰੀਕ ਉਹ ਫਰੀਕ ਤਾਂ ਸਭ ਨੂੰ ਚਾਹੁੰਦਾ ਚਾਨੂੰ ਬਧੇ ਤੇ ਜਿਹੜੀਆਂ ਬਰੀਕ ਗੱਲਾਂ ਨੇ ਉੱਥੇ ਰੋਸ਼ਨੀ ਜ਼ਿਆਦਾ ਚਾਹੀਦੀ ਤਾਂ ਉਹਨਾਂ ਤੇ ਰੋਸ਼ਨੀ ਪਵੇ ਤਾਂ ਦਿਨੀ ਉਹਦੀ ਸਮਝ ਆਉਂਦੀ ਹੈ ਕਿ ਬਰੀਕਲ ਕਾਹ ਬਰੀਕੀ ਆ ਰਾਹੁ ਕਰਪਾ ਤੇ ਹੋਏ ਪ੍ਰਗਾਸ ਪ੍ਰਭ ਦਇਆ ਤੇ ਕਮਲ ਵਿਗਾਸ ਪ੍ਰਭ ਦੀ ਜਿਹੜੀ ਧਿਆਣ ਜੋ ਨਾ ਧੇਨ ਕੀ ਹੈ ਜੋ ਦਿੱਤਾ ਹੈ ਜੋ ਪ੍ਰਭ ਦਾਤ ਹੈ ਦਇਆ ਦਾਤ ਹੈ ਇਹ ਕਮਲ ਵਿਗਾਸ ਹੋਇਆ ਬਹੁਤ ਖਿੜਿਆ ਖੁਸ਼ ਹੋਇਆ ਜਦ ਪ੍ਰਾਪਤੀ ਆ ਮਨ ਖੁਸ਼ ਹੁੰਦਾ ਪ੍ਰਾਪਤੀ ਤੇ ਮਨ ਖੁਸ਼ ਹੁੰਦਾ ਕੋਣ ਬੱਚੇ ਨੇ 10 ਪਾਸ ਕਰਕੇ ਸਾਡੀ ਮਿਲ ਕੇ ਖੁਸ਼ ਹੁੰਦੇ। ਪ੍ਰਾਪਤੀ ਨਾਲ ਖੁਸ਼ ਹੁੰਦੇ। ਪ੍ਰਭ ਸੁਪ੍ਰਸੰਨ ਬਸੇ ਮਨ ਸੁਏ। ਪ੍ਰਭ ਸੁਪ੍ਰਸੰਨ ਬਸੇ ਜਦੋਂ ਪ੍ਰਭ ਪ੍ਰਸੰਨ ਹੋ ਜਾਂਦਾ ਹੈ। ਤਬ ਉਲਟੇ ਵਿਚਾਰਦਾ। ਮੰਨਤੇ ਕਿ ਗੰਮੀ ਨਹੀਂ ਹਾਂ ਤੇ ਬਹੁਤ ਬੜਾ ਪ੍ਰਸੰਨ ਹੋ ਪਰਬ ਦੀ ਪ੍ਰਸੰਨਤਾ ਜਦ ਹੋ ਜੂਗੀ ਤੂੰ ਅੰਦਰ ਟਿਕਾ ਜੂ ਜਦੋਂ ਤੇਰੇ ਅੰਦਰ ਟਿਕਾ ਗਿਆ ਤੂੰ ਮੰਨ ਲੀ ਵੀ ਹੁਣ ਪ੍ਰਭ ਪ੍ਰਸਾਦ ਹੋ ਹੁਣ ਨਾਜ ਨਾ ਹੋ ਜੂਵੇ ਹਾਂ ਹੋ ਗਿਆ ਨਾਜ ਨਾ ਹੋ ਜੂਵੇ ਫਿਰ ਇਹ ਵੀ ਧਿਆਨ ਰੱਖਣਾ ਇਹ ਭੈਅ ਹੈ ਕਿ ਕੀ ਹੈ ਨਾਰਾਜ ਫੇਰ ਨਾ ਹੋ ਜੂਵੇ ਇਹ ਭੈਅ ਦੇ ਬਿਨਾ ਭਗਤੀ ਨਹੀਂ ਹੋਣੀ ਜਰਾ ਜੀ ਫੇਰਨਾ ਹੋ ਜਵੇ ਇੱਕ ਵਾਰ ਬਸੰਨਾ ਜੀ ਦੂਰ ਹੋ ਗਿਆ ਇਹ ਭੈ ਬੰਦ ਗਈ ਹਰ ਕਦਮ ਚਲਣਾ ਪਊ ਹਰ ਬੋਲ ਬੂਦਾ ਹੈ ਤੜਨਾ ਪਊਗਾ ਬੋਲਾਂ ਇਹ ਤਾਂ ਟੁੱਟ ਪ੍ਰੀਤ ਗਈ ਦੁਰ ਹੋ ਗਈ ਬੂਜ ਬੋਲੋ ਟੋ ਬੋਲੇ ਆ ਗਿਆ ਕੋਈ ਨਾ ਪ੍ਰੀਤ ਟੁੱਟ ਗਈ ਹੁਣ ਦਵਾਰਾ ਪ੍ਰੀਤ ਫੇਰ ਜੁੜੀ ਹੈ ਫੁਰ ਕੋ ਇਹ ਜੀ ਗੱਲ ਮੂੰਹੋਂ ਨਿਕਲ ਜਿਵੇਂ ਪ੍ਰੀਤ ਤੋੜੀ ਜੀ ਪਰ ਉਹ ਪ੍ਰੀਤ ਤੋੜੀ ਆ ਬੁਰਬូល ਬੋਲ ਕੇ ਉਹਨਾਂ ਨੇ ਗੁਰੂ ਕਰਦੇ ਖਰਾਬ ਜਿਹਾ ਬੋਲਦੇ ਤੇ ਪ੍ਰੀਤ ਕਿੱਥੇ ਸੀ ਸੱਚ ਦੇ ਖਿਲਾਫ ਬੋਲ ਕੇ ਪ੍ਰੀਤ ਸੀ ਮੰਨ ਹੀ ਪ੍ਰੀਤ ਸੁੱਖੋਂ ਕੱਢ ਲਾਉਂਦੇ ਸੁੱਖੋਂ ਕੱਢ ਲਾਉਂਦੇ ਨਾਰਗਵੀਓ ਬੋਲੋ ਇਸ ਨੂੰ ਪ੍ਰਚਾਰ ਕਰਦੇ ਨੇ ਅੰਦਰ ਕੋਈ ਤਾਨੀ ਨਹੀਂ ਜੀ ਪ੍ਰਭ ਦਇਆ ਤੇ ਮਤ ਉਤਮ ਹੋਏ ਪ੍ਰਭ ਦਇਆ ਤੇ ਮਤ ਉਤਮ ਹੋਏ ਪ੍ਰਭ ਜੀ ਜਿਹੜੀ ਦਇਆ ਕਿਰਪਾ ਹੈ ਦੇਣਾ ਹੈ ਉਹਦਾਂ ਮਤ ਉਤਮ ਹੋ ਜਾਂਦੀ ਹੈ ਸਭ ਸਰਬ ਮਤ ਹੋ ਜਾਂਦੀ ਹੈ ਸਰਬ ਮਤ ਉਹ ਹੈ ਜਿਹਨੂੰ ਸਾਰੇ ਸ੍ਰੇਸ਼ਟ ਬੁੱਧੂ ਸਾਹਿਬਾ ਬਰਦਾਸਤ ਸਭ सगਲ ਪਰਵਾਰਾਂ ਮਾਹੇ ਸ੍ਰੇਸ਼ਟ ਹੋ ਤੂੰ ਸ੍ਰੇਸ਼ਟ ਹੋਵੇ ਦੂਏ ਬੰਨਣ ਵੀ ਹਾਸ ਰੇਸ਼ਟ ਹੈ ਅੱਜ ਪਰਵਾਣੀ ਸਹਿਬੰਦੀ ਹੋਈ ਹੈ ਪਰ ਅਰਥ ਬਦਲੇ ਹੋਏ ਕਿ ਅਰਥ ਕਰਦੇ ਨੇ ਇਹਨੂੰ ਵਿਪਕ ਸ੍ਰੇਸ਼ਟ ਆਦੀ ਪਰੇ ਵੀ ਕਹਿੰਦੇ ਕਿ ਇੱਕ ਆਦਾਨ ਸ੍ਰੇਸ਼ ਨਹੀਂ ਹੈ ਕਿ ਦੂਜਾ ਆਦਾਨ ਫੈਸਲਾ ਹੱਤ ਬਦਲਣਾ ਹੈ ਸੀ ਪਰ ਇਸਲਾਮ ਵਾਲਿਆਂ ਨੂੰ ਪਤਾ ਵੀ ਸਰੇ ਸਹੀ ਨਹੀਂ ਹੈ ਉਹ ਕਹਿੰਦੇ ਨੇ ਸਭ ਤੋਂ ਪਰਭਾਵ ਸੀ ਦੂਜਾ ਉਹਨਾਂ ਕਹਿੰਦੇ ਸਾਡੇ ਨਾਲ ਘਟਿਆ ਫਿਰਦੇ ਨੇ ਮੂਰਤੀ ਪੂਜਦੇ ਤੇ ਤਹੂਰਤੀ ਪੂਜਾ ਦੇ ਬਰਾਬਰ ਤੇ ਚਲੇ ਉਹ ਤਾਂ ਸੀ ਕੁਰਾਨ ਨੂੰ ਨਾ ਪੂਜਦੇ ਨੇ ਸਾਡੇ ਨੂੰ ਨਾ ਤਰਾਦੂਰੇ ਦਾਸ ਸਾਡੇ ਨੂੰ ਨਾ ਤੂੰ ਉਪਤੀ ਕਰਦੇ ਨੇ ਖਰਾਬ ਦੀ ਸਾਡੇ ਉਹ ਪ੍ਰਾਧ ਦੀ ਗੱਲ ਬੋਲਦੇ ਸੀ ਉਹਦੀ ਗੱਲ ਮੰਨਦੇ ਨਹੀਂ ਤੂੰ ਉਪਤੀ ਜਿਆਦਾ ਕਰਦੇ ਤੂੰ ਜਾਣੇ ਦਿਖਾਵਾ ਜਿਆਦਾ ਉਹ ਕਰਨਾਗੇ ਜੇ ਮੈਂ ਉਹ ਸੀ ਇਹਦੀ ਗੱਲ ਨਾਲੇ ਉਹ ਨਾ ਬਦਲਣਗੇ ਤੇ ਉਹ ਇਸਲਾਮ ਦਾ ਆਖੀ ਜਿਹੜੇ ਨੇ ਉਹ ਡਿਗਰੀ ਦੇ ਪਬਲਿਕਲੀ ਦਾ ਪ੍ਰਚਾਰ ਕਰਦਾ ਹੈ ਨਹੀਂ ਹਿੰਦੁਸਤਾਨ ਹੈ ਪਬਲਿਕਲੀ ਪ੍ਰਚਾਰ ਕਰਦੇ ਕਦੇ ਵੀ ਨਹੀਂ ਕਰਦੇ ਹਨ ਕੀਤਾ ਹੀ ਨਹੀਂ ਇਦਾਂ ਫਰਚਾ ਰਹੇ ਨੇ ਪ੍ਰਚਾਰ ਕਰਦੇ ਰੋਧ ਨਹੀਂ ਉਹ ਚੀਜ਼ ਦਾ ਕਰਦੇ ਹੋ ਆਹੋ ਉਹ ਚੀਜ਼ ਜੇ ਸਾਡੇ ਨਹੀਂ ਕਰਦੇ ਕੁਰਬਾਨੀ ਦਾ ਪ੍ਰਚਾਰ ਉਹ ਵੀ ਨਹੀਂ ਕਰਦੇ ਫੇਰ ਸੇਰੋ ਇਸਲਾਮ ਨਹੀਂ ਫੈਲਦਾ ਹੈਗਾ ਕਿਸ ਗੱਲ ਉਹ ਜੇ ਖਰੇ ਅੱਬ ਨਹੀਂ ਹਣ ਉਹ ਆਪੀ ਸੇ ਸਾਡੇ ਜਿਵੇਂ ਗਰੱਥੀ ਨੇ ਉਹ ਆਪਨੀ ਹੈ ਮੁੱਲਾਂ ਦੇ ਖਿਲਾਫ ਇੰਦੀਆਂ ਕਹਾਣੀਆਂ ਨੇ ਇੰਦੀਆਂ ਗਾਲਾਂ ਕੱਢਦੇ ਨੇ ਉਹ ਤੁਸੀਂ ਤਾਂ ਯੂਪ ਚ ਰਹੇ ਦੀ ਹਾਂ ਕਾਇਦੇ ਖਿਲਾਫ ਇੰਦੀਆਂ ਬਣਾਈਆਂ ਨਹੀਂ ਆ ਸੀ ਸਾਡੇ ਦਾ ਹੈ ਨਹੀਂ ਸੀ ਬੋਨੇ ਮੰਦਿਆਂ ਨੂੰ ਇਹ ਠੀਕ ਨਹੀਂ ਆਜ਼ਮੀ ਕ੍ਰਪਾ ਸਿਖਾਰੀ ਹੈ ਉਹਨਾਂ ਨੇ ਦਾਤਵਾਦ ਨੂੰ ਕਿਹਾ ਹੈ ਜੇ ਜਦੋਂ ਹਿੰਦੂ ਮੁਸਲਮਾਨ ਉਹ ਤੋਂ ਪ੍ਰਚਾਰ ਉਹਨਾਂ ਨੇ ਕਿਹਾ ਨਹੀਂ ਕੀਤਾ ਉਹਨਾਂ ਨੇ ਗੁਰਦਾਨ ਦੇ ਵੇਲੇ ਗੁਰਨਾਮ ਕਰ ਰਹੇ ਮੁਸਲਮਾਨ ਸੱਚ ਸ਼ਰੀਅਤ ਸ਼ਰੀਅਤ ਦਾ ਪ੍ਰਚਾਰ ਕਰਦੇ ਹਾਂ ਪ੍ਰਾਰਥਨਾ ਦੀ ਪ੍ਰਚਾਰ ਕਰਦੇ ਉਹ ਸਿੱਧਾ ਬਰਤਾਲ ਨਹੀਂ ਕਰਦੇ ਹੁਣ ਜਿਹੜੇ ਲੋਕ ਕਹਿੰਦੇ ਨੇ ਜਿਹੜਾ ਆਦਮੀ ਹੈ ਹਤਵਾਦੀ ਹੈ ਉਹ ਹੋ ਹੀ ਨਹੀਂ ਸਕਦਾ ਮੁਸਲਮਾਨ ਸੱਚਾ ਸੱਚਾ ਮੁਸਲਮਾਨ ਕੌਣਾ ਕੌਣ ਨਹੀਂ ਇਹ ਗੱਲ ਦਾ ਨਹੀਂ ਬਰਕਾਰ ਕਰਦੇ ਉਹ ਤਾਂ ਵਿਸਾਰੇ ਹੋ ਮੇਰੇ ਸਿਰ ਤੇ ਜਿਹੜੇ ਚੌਧਰੀ ਜੱਜਾ ਜੀ ਉਹਨਾਂ ਨੇ ਵੀ ਹੋਇਆ ਸਰਬਨਿਧਾਨ ਤੇਰੀ ਸਰਵਨਿਦਾਨ ਸਰਬ ਤੇਰੀ ਮਾਇਆ ਹੁਣ ਆ ਰਹੀਆਂ 3-4 ਮਨੁੱਖੇ ਮਾਤਾ ਬੈਠਾ ਜੋ ਮਾਤਾ ਬੈਠਣਾ ਹੈ ਤਾਂ ਗੜ ਆਗਰੀ ਪੰਕਤੀ ਉੱਪਰ ਪਉਦੀ ਹੈ ਹਾਂ ਹਾਂ ਸਰਬਨਿਧਾਨ ਪ੍ਰਭ ਤੇਰੀ ਮਾਇਆ ਇਸ ਸੰਬੋਧਨ ਇਹ ਸਾਰਾ ਸੰਬੋਧਨ ਪ੍ਰਭ ਨੂੰ ਹੈ ਹਾਂ ਉਹ ਉਹਦੇ ਉਸ ਮੋਦਰ ਮਾਨੂ ਸੀ ਮਾਨੂ ਦੇ ਥਰੂ ਆ ਕੇ ਉਹਦੇ ਬਾਰੇ ਦੱਸਿਆ ਜਾ ਰਿਹਾ ਸੀ ਹਾਂ ਇਹ ਤੇਰੀ ਮਾਇਆ ਜਦ ਮਾਇ ਜਦ ਕਰਦੀ ਹੈ ਸਰਬਨਿਧਾਨ ਤੇਰੀ ਮਾਇਆ ਕਹਿੰਦੀ ਹੈ ਅਸਲ ਤਾਂ ਮਾਨੂ ਕਹਿੰਦੇ ਆ ਵੀ ਆਹ ਹੈ ਗੱਲ ਸੌਂਦੀ ਦਾ ਉਹਨੂੰ ਆ ਨਾਉ ਨਾ ਕਿ ਨਹੀਂ ਬੁਲਾ ਸਰਾਉ ਉਹ ਵੀ ਰਹੀ ਐ ਸਰਾਉ ਉਹਦੇ ਨੂੰ ਰਹੀ ਐ ਲੈ ਕੋ ਹੂੰ ਪਛੂਨਾ ਕਿਨ ਹੂੰ ਲਿਆ ਆਪਣੇ ਆਪ ਨਹੀਂ ਕਿਥੇ ਪੁੱਛ ਮਿਲਿਆ ਜੇ ਤੂੰ ਚਾਹੇ ਪ੍ਰਭੂ ਤੋਂ ਇਹਦੇ ਥਰੂ ਆ ਮਿਲਣਾ ਸੱਤ ਕੋਤੇ ਨਾਉ ਪਾਇਆ ਜਾਏ ਉੱਤੇ कोई ਪੱਤਾ ਕੋਈ ਫੜ ਲੱਗਿਆ ਕੋਈ ਟਾਹਣੀਆਂ ਕੋਈ ਟਾਣੇ ਬਿਨਾਂ ਜੜਾਂ ਤੇ ਮੂਰਤੇ ਉੱਤੇ ਖਰਾਬ ਨਹੀਂ ਜਾ ਸਕਦੀ ਕਿਸੇ ਜੋ ਵਿਜੂਦ ਪੱਤੇ ਦਾ ਵੀ ਹੈ ਉਹ ਜੜ ਦੀ ਵਜ੍ਹਾ ਨਾਲ ਹੈ ਮੂਲ ਦੀ ਵਜ੍ਹਾ ਨਾਲ ਉਹ ਆ ਸਾਰੇ ਉਸ ਸਮਾਪਕਾਰ ਦਿੰਦੇ ਜੋ ਦਾ ਰੂਪ ਆ ਫੁੱਲ ਖੜੇ ਹੋਏ ਨੇ ਟਾਣੀ ਹਰੀ ਭਰੀ ਹੈ ਤੇ ਸਾਰਾ ਉੱਤੇ ਦਰਹਿਦਰ ਰੂਪ ਰੰਗ ਹੈ ਕਿਸੇ ਟਾਣੀ ਦਾ ਸਾਰਾ ਉਹ ਜੇ ਤੈਨੂੰ ਭੜਵੀ ਲੱਗਦੇ ਨੇ ਇਸ ਕਰਕੇ ਤੇਰੀ ਤੌਰ ਹੈ ਪਿਆਮਦਾ ਬੂਟਾ ਇਹਨੇ ਦਾ ਬਖਿਆ ਇਹਦੀ ਕੀ ਬੂਟਾ ਤਾਂ ਵੀ ਮੋੜ ਦੇ ਵਜਾਲ ਰੋ ਸਾਡਾ ਆਪਣੇ ਆਪ ਨੇ ਕਦੇ ਕਿਸੇ ਨੂੰ ਕੁਝ ਪ੍ਰਾਪਤੀ ਹੋਈ ਇਹ ਤਾਂ ਕੋਈ ਤੁਹਾਡਾ ਰਿਕਰਡ ਦਾ ਬਰਾਤੀ ਦਵਾ ਹੋਵੇ ਡਿਫਾਲਟਰ ਹੈ ਵਾਡਰ ਨੂੰ ਕੋ ਦੋ ਨਾ ਤਾਂ ਕੋ ਕਾਲ ਥਲੇ ਜਾਨਨ ਤਾਂ ਤੇ ਕਹਾਂਦਾ ਦਰਮਨ ਨਹੀਂ ਹੱਲ ਮੜਾ ਜੀ ਨਹੀਂ ਇਹਦੀ ਕਿਤੇ ਨਹੀਂ ਗੱਲੇ ਨਹੀਂ ਕਿਤੇ ਹੋਈ ਮੈਨੂੰ ਹਾਲੇ ਵੀ ਇਹ ਗੁਰੂ ਨਹੀਂ ਲੈਂਦਾ ਲੋਹਣਾ ਦਾ ਹੋਣਾ ਦਾ ਲੋਹਣਾ ਦਾ ਘਾਟਾ ਫਲੂ ਕਰਦਾ ਇਹਨਾਂ ਨੇ ਮੰਨ ਕੇ ਬਾੜੀ ਉਹ ਤਾਣੀ ਦਾ ਟੈਂਡਾ ਸਭ ਕੁਝ ਵੀ ਨਹੀਂ ਰਹਿਦਾ ਜੇ ਤੁਸੀਂ ਗੁਰੂ ਰੱਖਣਾ ਉਹਨਾਂ ਨੇ ਪ੍ਰਭ ਰੱਖਣਾ ਫੇਰ ਹਾਰ ਨਹੀਂ ਗੁਸਣਾ ਉਹ ਫੇਰ ਇਹ ਨਹੀਂ ਰਹਿਣਾ ਜੇ ਇਹ ਰੱਖਣਾ ਤਾਂ ਉਹ ਨਹੀਂ ਰਹਿਣਾ ਜੇ ਤੂੰ ਰਖਣਾ ਸੱਚੀ ਰਹਿਣਾ ਜੇ ਸੱਚ ਰਖਣਾ ਬੈਠੇ ਹੋਣਾ ਇੱਕ ਹੋਰ ਜਿਤ ਜਿਤ ਲਾਭ ਹੋ ਤਿਤ ਲਗੈ ਹਰੀਨਾਥ ਨਾਨਕ ਨ ਹੋ ਇੱਕ ਹੋਰ ਹੁਣ ਗੱਲ ਫਸਾ ਲਿਆ ਅਖੀਰ ਜਾਈ ਨਾਸ ਨੂੰ ਫਸਾ ਲਿਆ ਬੁੱਧੀ ਪਹਿਲਾ ਮੰਨੋ ਵੀ ਮੂਰਖ ਕਹਤਾ ਸਭ ਕੁਝ ਕਹਿ ਕੇ ਆਖਰੀ ਕੁਟੜੀ ਤੇ ਹਰੀ ਫਸਾ ਲਿਆ ਮਾਨਵੀ ਬਰੀ ਕਰਤਾ ਆਪ ਵੀ ਬਰੀ ਹੋਗੀ ਜਨ ਆਸ ਹੈ ਨਾ ਤੇਰੇ ਹੱਥ ਚ ਇਸ ਕੀ ਤੂੰ ਜਦੋਂ ਬਿਟੇ ਗਈ ਨਾ ਤੇ ਜਿਤਨੂ ਉਹਦਾ ਤਾਇ ਸਾਰਾ ਕੀਤਾ ਉਦਨ ਵੇਸੇ ਕਰਾਂ ਤੇਰੇ ਹੱਥ ਚ ਗੱਲ ਕਹਿ ਕੀ ਆਖਰ ਦੀ ਗੱਲ ਕਹਿ ਦਿੱਤੀ ਅੱਜ ਪ੍ਰਭ ਲਾਵੋ ਤਿਤ ਲਗੈ ਹਰੀਨਾਥ ਹਰੀਨਾਥ ਉਹਦਾ ਜਿੱਦ ਤੂੰ ਲੜਦਾ ਰਿਹਾ ਅਸੀਂ ਲੱਗੇ ਆ ਛੋਟਾ ਤੂੰ ਬੜੀ ਬਾਤ ਕਹਿਦਾ ਸਕਦੇ ਨਹੀਂ ਤੈਨੂੰ ਕਿ ਤੂੰ ਨਾਦ ਹੈ ਪਰ ਗਲਤੀ ਤਾਂ ਤੇਰੀ ਹੋਇਆ ਨਾਮ ਨੂੰ ਨਾਮ ਉਹ ਜਿਹੜੀ ਸਾਰੀ ਸਾਰੀ ਕਵੀ ਹੋ ਜੇ ਹੈ ਲੈ ਨਹੀਂ ਸਕਦੇ ਕਦ ਤਾ ਸਾਰਾ ਗੱਲਿਆ ਗਿਆ ਫਿਰ ਕੀਤੀ ਤੇ ਆ ਕੇ ਥੋੜਾ ਉੱਤੇ ਝੜਤਾ ਉਹਨੇ ਕੋਸ ਤੋਂ ਸਾਥ ਤੇ ਝੜ ਅੱਛੀ ਜੇ ਪਾ ਨਹੀਂ ਸਕਦੇ ਕੁਝ ਤੇ ਉਹ ਤੇ ਬਨਾ ਜੇ ਪਾ ਨਹੀਂ ਸਕਦੇ ਆਪੋਂ ਕਿਧੋ ਨਾ ਕਛੋ ਧਿਆਵ ਜੇ दयावित दयावित तेरे ही या जे, जे थी थी तो दंदा ना दंगेगा दयावित तेरे जइया जे लेयानी ਦਾ ਦਿੱਤਾ ਵੀ ਅਸੀਂ ਕੁਝ ਕੀਤਾ ਜੇ ਉਹਨਾਂ ਨੇ ਆ ਇਹਨਾਂ ਕਾ ਦੇ ਜੁਵਾਦੇ ਸੀ ਨਹੀਂ ਸੀ ਉਹਨਾਂ ਬੋਲਣਾ ਤੇਰੇ ਕੋਲ ਹੈ ਸਮਝੇ ਇਸ਼ਾਰਾ ਤੇਰਾ ਦੋਹਾਂ ਦੇ ਹਾਰਾ ਮਾਰੀਆਂ ਉਹ ਪੂਰੇ ਜੇ ਕੋਈ ਆ ਗਿਆ ਭਾਈ ਬਿਆਣਾ ਕਹਿਦਾ ਜੋ ਆ ਗਿਆ ਕੋਈ ਬੋੜਾ ਢੇਰਾ ਹੋਰ ਜਿਹੜਾ ਨਹੀਂ ਬਸ ਸਕਿਆ ਗਲਤੀ ਤੇ ਤੇਰੀ ਆ ਤਾਂ ਅਰਾਦਾ ਤੇਰਾ ਮਾਰੂੰ ਨਾ ਦੀਉਂ ਬੋੜਾ ਤੇ ਦਾ ਜਾਣ ਗਿਆ ਅਰਾ ਮਾਰਤੀ ਉਹ ਬਹੁਤ ਵੇ ਵਸੇ ਹੋ ਗਏ ਜਿੱਡੀ ਲੱਗੀ ਭਰ ਗਿਆ ਜਿਹਦੇ ਪਿੱਛੇ ਤੇ ਆਰਮਾਰਦਾ ਉਹ ਜਾਨਵਰ ਦਸਤੀ ਖਲਦ ਇਸ ਕਰਕੇ ਉਹ ਕਹਿੰਦੇ ਵੀ ਜਿੱਤੇ ਤੇ ਲਾਵੋ ਤੇ ਤੇ ਲੱਗੇ ਹਾਲਾ ਤੇ ਤੇ ਲੱਗੇ ਹਾਲਾ ਕਈ ਵਾਰ ਫੇ ਜੇ ਲੱਗਣਾ ਨਾ ਚੁੱਕੀ ਸਾਈਂ ਆਹ ਕਈ ਵਾਰ ਤਾਂ ਗੈਤ ਇਹ ਗੱਲ ਪੂਰਾ ਲਿਆ ਕੇ ਲਿਆ ਕੇ ਅਗੇ ਮਗੈਦਾ ਉਹਤਾਵੇ ਦਸਤੀ ਦਾ ਤੇਰੀ ਹੋਇਆ ਅਸੀਤਾ ਜੋ ਚਾਨਣ ਕਿ ਹਾਂ ਵੀ ਕੋਮਾਂ ਦੀ ਆਉਂਦੀ ਹੈ ਕਿਹਾ ਦਸਤੀ ਦਸਤੀ ਨੇ ਕਿਹਾ ਮਾਕੀ ਦਾ ਇੱਕ ਗੱਲ ਤੇ ਸਾਡੀ ਟੋਕਰੀ ਉਹਦੇ ਦਿਲਤੀ ਅੱਗੇ ਸਾਰਾ ਟੋਕਰਾ ਜਾਂਦਾ ਦਿਲ ਤੋਂ ਗਰਤੀਆਂ ਦਾ ਸਾਰਾ ਟੋਕਰਾ ਉਹਦੇ ਦਿਲ ਤੋਂ ਤੇਰਾ ਅਸਲ ਤੇ ਉਹਦਾ ਹੀ ਮਨ ਜਿਵੇਂ ਤਾਂ ਲਾਇਆ ਹੋਵੇ ਕੀਤਾ ਹਾਂ ਜਿਵੇਂ ਕਹਿ ਲਾਇਆ ਹੋਵੇ ਕੀਤਾ ਜਿਵੇਂ ਕਹਿ ਲਾਇਆ ਹੋਵੇ